लोक मोहल्ला तीजा करम तरम सब बंदना, पाप पुण्य संबंध ममता मोह सो वंदना पुत्र कलत्तर सुतंद धर्म कर्म और कर्म धर्म अच्छा okay. इतना दोबारा है जेले कर्म में धर्म वास्ते आदमी दे बैठे होए ओ ਉਹ ਕਹਿੰਦੇ ਕਰਮਾ ਧਰਮਾ ਧਰਮ ਕਰ। ਧਰਮਾ ਕੀ ਦਸੂਗਾ ਕਰਮ ਠੀਕ ਕਰਦੇ। ਧਰਮ ਰਾਜ ਦਸੂਗਾ ਪਰਮੇਸ਼ਰ ਦਸੂਗਾ ਕਰਮ ਤੈਨੂੰ ਕੀ ਕਰਨਾ ਚਾਹੀਦਾ? ਗੁਰੂ ਦਸੂਗਾ ਕੀ ਕਰਨਾ। ਇਹਨਾਂ ਨੇ ਆਪ ਆਪਣੇ ਬੁੱਧਾ ਜੇਤੀ ਗੁਰੂਤਪੈ ਉਹ ਇਹ ਕਾਬੂ ਪਰਨਤ ਕਰਕੇ ਲੋਕਾਂ ਨੂੰ ਦੱਸਦੇ। ਉਹਨਾਂ ਨੂੰ ਕਿ ਕਰਮਾਂ ਧਰਮ ਕਰਮ ਦੇ ਵਿਚੋਂ ਧਰਬਾੜਦਾ ਅੱਛਾ ਸਾਰਾ ਫਿਰ ਲੱਗੇ ਆਪਣੀ ਵਰਤੀ ਨਾਲ ਧਰਦਾ ਉਹਦੇ ਵਿੱਚੋਂ ਧਰਮ ਨਹੀਂ ਨਹੀਂ ਬਣ ਸਕਦਾ ਆਪਣੇ ਮਰਜ਼ੀ ਨਾਲ ਸਮਝਦੀ ਲਾਉਣ ਲੱਗ ਗਿਆ ਆਪਣੀ ਵਸੀ ਨੂੰ ਜਲਦਾ ਰਤਨ ਲੱਗ ਗਿਆ ਆਪਣੀ ਤਰਜੀਹ ਲਤ ਹੋਈ ਤਾਂ ਲੱਗ ਗਿਆ ਆਪਣੀ ਮਰਜ਼ੀ ਨਾਲ ਹਟੇ ਸ਼ੁਰੂ ਕਰ ਲਿਆ ਆਪਣੀ ਮਰਜ਼ੀ ਨਾਲ ਤੂੰ ਲੱਗ ਗਿਆ ਤੂੰ ਆਪਣੀ ਵਰਤੀ ਨਾਲ ਕੀਤਾ ਉਦੋਂ ਕੁਝ ਨਹੀਂ ਬਣਨ ਵਾਲਾ ਉਹ ਬੜਾ ਫਾਲੀ ਲੱਗਦਾ ਉਹ ਬੜਾ ਨਹੀਂ ਹੈ ਫਾਲੀ ਲੱਗਦਾ ਫਾਲ ਕੀ ਨਹੀਂ ਲੱਗਦਾ ਗਿਆਨ ਫਾਲੀ ਦਾ ਬਣੋ ਜੋ ਗਿਆਨ ਦੀ ਬਣ ਲੋ ਉਹਦੇ ਜੇ ਬਿਰੂ ਤਾਂ ਕੀ ਬਿਰੂ ਉਹਦੇ ਬਿਰੂ ਲੋਕਾਂ ਦੀ ਵਡਿਆਈ ਸੰਸਾਰੀ ਵਡਿਆਈ ਜੇਕਿ ਚ ਪਾਵੇ ਤੇ ਉਤਾ ਮਾੜ ਸਦਮਾਨ ਬਿਰੂ ਚ ਬਸਲ ਜੂ ਇਸ ਕਰਕੇ ਇਹ ਕਰਮ ਤਰ ਨੂੰ ਸਭ ਬੁੱਧ ਨੂੰ ਲੱਗੇ ਅੱਛਾ ਇਹ ਬੰਦਨ ਜਪਣ ਵਾਲੇ ਨੇ ਫਿਰ ਕਾਲਾ ਜੋ ਅੱਗ ਜਿੰਨੇ ਵੀ ਕਰਮ ਕਰੇ ਪਾਠ ਪੜਿਓ ਔਰ ਬੇਦਬਿਚਾਰੇ ਔਰ ਬਿਲਕੁਲ ਪੂਰੀ ਗੁਦ ਸਾਦੇ ਪਲਚ ਜਾਣਾ ਸੇ ਸਤ ਗੁਰੂ ਸੋਟਕੇ ਅਧ ਕਹ ਰੂਹ ਬੁੰਦ ਬੰਦ ਦੇ ਉਪਰ ਜੀ ਬਦੀ ਅਗੁਰ ਬੁੰਦ ਹਾਰਿਤ ਕੋਈ ਹੈ ਦਾ ਅਭੁਦ ਬੱਦ ਕਿਾਰੇ ਇਤ ਵਿਧੀ ਮਿਲਣ ਜਾਈ ਇਤ ਵਿਧੀ ਬਿਜੀ ਬਹੁਤ ਚੁਦੇ ਜਾਈ ਮੈਂ ਕੀਏ ਕਰਮ ਅਧੇਕਾ ਹਾਰ ਪਰੋ ਸੁਆਮੀ ਦੇ ਦਵਾਰੇ ਦੀਜੇ ਬੁੱਧ ਬਿਵੇਕਾ ਇਹ ਬਿਵੇਕਮੰਦੀ ਗੁਰਬਾਣੀ ਹੈ ਸੱਚਖੰਡ ਦੀ ਬੁੱਧੀ ਹੈ ਇਹ ਦੱਸੂਗੀ ਇਹ ਧਰਮ ਰਾਜ ਦੀ ਬੁੱਧੀ ਹੈ ਇਹ ਦੱਸੂਗੀ ਕੀ ਕਰਨਾ ਕੀ ਨਹੀਂ ਕਰਦਾ ਦੁਨਿਆ ਦੇ ਜਿੰਨਾ ਧਰਮ ਨੇ ਆਪਣੀ ਵਰਗੀ ਦੇ ਢੜੇ ਆਦਮੀ ਉਹਦੇ ਖੜੇ ਤੇ ਆਦਮੀ ਦਾ ਨਾਮ ਨਾਲ ਲੱਗੇ ਰਿ ਇਸ਼ਾ ਦਾ ਲੱਗਿਆ ਹੈ ਕਿਸ ਬੁੱਸਾ ਦਾ ਲੱਗਿਆ ਹੈ ਕਿਸ ਬੁੱਧ ਦਾ ਨਾਮ ਲੱਗਿਆ ਹੈ ਕਿਸ ਸਿਮਰਤ ਦਾ ਨਾਮ ਲੱਗਿਆ ਹੈ ਇਹਦੇ ਨਾਲ ਕਿਸੇ ਆਦਮੀ ਦਾ ਨਾਮ ਨਹੀਂ ਲੱਗਿਆ ਕਿਸੇ ਅੱਜ ਦੀ ਧਰਮ ਦੀ ਹੈ ਇਹ ਗੁਰਮਤਿ ਮੁਰਤੀ ਮਤ ਤੁਲੇ ਹੋਇਆਂ ਇਹ ਕਰਮ ਧਰਮ ਕਰਮ ਦਾ ਜਨਾਜ ਰਸਾਂ ਨੂੰ ਫਰਕ ਨਹੀਂ ਸਭ ਚਾਉਂਦਾ ਤੇ ਇਹ ਖਾਸੀ ਗੁਰਜ ਵੱਡੀ ਹੈ ਖੁਦ ਹੀ ਗਿਆਨ ਕਾਰਨ ਕਰਮ ਅਭਿਆਸ ਗਿਆਨ ਪਿਆ ਤਾਂ ਕਰਮ ਹੈ ਫਿਰ ਇੱਥੇ ਗੱਲ ਬਣਦੀ ਜਾ ਹਾਂ ਇੱਥੇ ਗੱਲ ਬਣਦੀ ਆ ਚਿਰ ਗਿਆਨ ਨਹੀਂ ਹੈਗਾ ਉਹਨਾਂ ਚਿਰ ਤੱਕ ਕਰਮ ਅਭਿਆਸ ਕਰ ਕੀਤੇ ਕਦੀ ਨਾ ਕੀਤੇ ਨਾ ਤਾਂ ਦੇ ਨਾ ਫਿਰਦਾ ਸੀ ਕਰਮ ਅਭਿਆਸ ਸੀ ਤਿਆਰ ਹੋ ਗਿਆ ਛੱਡ ਤੇ ਸਭ ਠੀਕ ਹੈ ਜੀ ਪਾਪ ਪੁੰਨ ਸੰਬੰਧ ਕਰ ਉਹ ਤਰਬੂਜ ਜਨਾ ਦਾ ਪਾਪ ਔਰ ਪੁੰਨ ਦਾ ਪਾਪ ਕਰਮ ਨੇ ਕੁਝ ਧਰਮ ਦੇ ਕਰਮ ਨੇ ਪੁੰਨ ਕਰਮ ਨੇ ਪੁੰਨ ਕਰਮ ਆਲਾ ਕੋਈ ਚਾਹੁੰਦਾ ਅੱਗੇ ਬਿਰੂ ਜੰਮਾ ਬੜੂਗਾ ਸੁਰਗ ਬੜੂਗਾ ਪਾਪ ਦੁੱਖ ਬੜੂਗਾ ਸੋਖਰ ਤੋਂ ਉਹਨਾਂ ਸੰਬੰਧ ਦੇਗੇ। ਸੋਖਰ ਨਾਲ ਕੋਈ ਸਬੰਧ ਨਹੀਂ ਹੈ। ਪਾਪ ਪੁਰਨਾ ਜੋੜ ਦਿੰਦੇ ਨੇ ਆ ਕੇ ਇਹ ਤੁਹਾਨੂੰ। ਤੇ ਜਿਹੜਾ ਧਰਮ ਕਰਮ ਦੀ ਗੱਲ ਆ ਸਿਰਫ ਦੋ ਬਾਰੇ ਆਉਂਦਾ ਬਾਣੀ ਵਿੱਚ ਸਵਈਏ ਮਹੱਲੇ ਚੌਥੇ ਗੇ ਚ ਆਉਂਦਾ ਜੀ ਧਰਮ ਕਰਮ ਪੂਰੇ ਸੋਹਣੇ ਧਰਮ ਵਾਲਾ ਕਰਮ ਹੈ ਉਹ ਪੂਰੇ ਸਤਗੁਰ ਤੋਂ ਪਾਈ ਹੈ ਇਹ ਇਹ ਦਾ ਸਿਧਾਂਤ ਠੀਕ ਹੈ ਜੀ ਕਿਹੜਾ ਸੰਤ ਨੇ ਇਹ ਆਪ ਸੰਤ ਸਮੂਹ ਰੇਗਮਤੀ ਕੇ ਕਿਉਂ ਨੇ ਕਿਉਂ ਦੱਸੋ ਸੰਤ ਸਮੂਹ ਸਾਰੇ ਹੀ ਦੇਖ ਰਹੇ ਹੋ ਸਾਰੇ ਆਪਣੀ ਮਰਜ਼ੀ ਦੇ ਕਰਮ ਧਰਮ ਕਰਮ ਤੋਂ ਟੱਲ ਜੇ ਦੀ ਸੈਂ ਇਹ ਉਹ ਕਰੀ ਜਾਂਦੇ ਨੇ ਸਾਰੇ ਕਹੇ ਤੇ ਗੁੱਸਾ ਕਰਦੇ ਨੇ ਠੀਕ ਹੈ ਜੀ ਜੇ ਨਾ ਦੱਸੇ ਹਾਂਜੀ ਤਾਂ ਜੇ ਦੱਸੇ ਤਾਂ ਔਖਾ ਠੀਕ ਹੈ ਜੀ ਚਲਾਂ ਦਾ ਭਿਜੇ ਨੇ ਹਾਂ ਜੀ ਦੋਵੇਂ ਮੋਹ ਸੋ ਬੰਦਨਾ ਪੁੱਤਰ ਕਲੱਤਰ ਸੋਤੰਦ ਬੂਵਤਾ ਮੋਹ ਸੋ ਬੰਦਨਾ ਕਰਕੇ ਕਰਦੇ ਆ ਕਰਮ ਕਰਮ ਲੋਵਰ ਕੇ ਕਰਦੇ ਆ ਉਹ ਆਮਾਈ ਕਰਾਉਂਦੀ ਐ ਕਰਮ ਧਰਮ ਪੁੱਤਰ ਘਰ ਦਾ ਧਰਮ ਦੇ ਘਰ ਵਗਰਦਾ ਪੁੱਤਰ ਹੋਇਆ ਪਮਾਲ ਹੋਇਆ ਠੀਕ ਹੋਇਆ ਕਿਆ ਗਾਂ ਪੁੱਤਰ ਦੇ ਪੁੱਤਰ ਹੋਇਆ ਪੁੱਤਰ ਦਾ ਕਾਰੋਬਾਰ ਚੱਲਦਾ ਹੋਇਆ ਸਾਰ ਆਪ ਚ ਉਲਝਿਆ ਹੋਇਆ ਆਪਣੇ ਜਾਲ ਚ ਹੋਇਆ ਹੋਇਆ ਪੁੱਤਰ ਕਲੇਤਰ ਸਰਵਰ ਇਹਨਾ ਕਮਾਤਾ ਪੁੱਤਰ ਤਲਤਰ ਤਲਤਰ ਸਟੇਜ ਬੰਦੇ कुटुंब ਨਾਲੇ ਸੰਬੰਧ ਹੈ ਅੱਛਾ ਕਰਮ ਯਾਨੀ ਪਰਿਵਾਰ ਵਾਸਤੇ ਇਹ ਕਰਦਾ ਥਰਮ ਜਿਹੜੇ ਕਰਦਾ ਠੀਕ ਇੱਕ ਕਰਨ ਕਰਪ ਦੇ ਜਿਹੜੇ ਕਰਨ ਕਰਪ ਪਰਿਵਾਰ ਵਾਸਤੇ ਕਰਮ ਕਰਨੋ ਵਾਸਤੇ ਅੱਧੀ ਵਾਸਤੇ ਠੀਕ ਹੈ ਜੀ ਜਹ ਦੇਖਾਂ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੇ ਅੰਦ ਮੈਂ ਜਿੱਥੇ ਵੀ ਦੇਖਦਾ ਜਿੱਥੇ ਤੱਕ ਨਿਗਾਹ ਜਾਂਦੀ ਹੈ ਮਾਇਆ ਦੀ ਜੇਵੜੀ ਹੈ ਮਾਇਆ ਦਾ ਰਸਾਇਆ ਹੋਇਆ ਸੰਸਾਰ ਸਾਰਾ ਮਾਇਆਲ ਕਿਆ ਰਸਤੀ ਤੇ ਬਣਦੀ ਹੁੰਦਾ ਜੇਵੜੀ ਵੀ ਦੇਖਦਾ ਵਾਯਾ ਦੀ ਜੇਬੜੀ ਕਿਤੇ ਦਾ ਪੈਰੜੂ ਵਿਕਦੇ ਇਤਿਹਦਾ ਫਸੂਏ ਫਸ ਜਾਂਦਾ ਹੀ ਹੈ ਜਿਵੇਂ ਰਸੀਦੇ ਤੂਪਾ ਫਸੂਗਾ ਸਹੀਓ। ਜਾਂ ਦੇਖ ਰੁਤਾ ਜੇਬੜੀ ਹਾਂਜੀ ਮਾਇਆ ਦਾ ਸੰਬੰਧ ਵਾਇਆ ਵਰਤੇ ਹਾਂ ਤੋਂ ਵੀ ਲੋਕ ਦੇ ਜਿਹੜੇ ਗਿਆਨ ਤੋਂ ਬੁੱਧੇ ਨੇ ਅੰਨੇ ਹੋ ਗਏ ਤੁਰੀ ਜਾਂਦੇ ਨੇ ਰਸਤੇ ਸੇ ਰਸਤੇ ਠੀਕ ਹੈ ਅੰਨੇ ਹੋ ਗਏ ਮੈਂ ਤੁਰੀ ਜਾਂਦਾ ਨੇ ਜਪੀ ਦਾ ਕਬ ਚਿੱਬਾ ਥਾਲੋ ਗਾਣ ਬਧੀ ਅਹਲਾਨੇ ਦਾ ਜੀ ਬਲਾ ਸਾਰੀ ਮਰ ਰੋਣੀ ਬੜੇ ਜਾਨੇ ਪਾੜੇ ਆਉ ਕੀ ਤਾਉ ਕੀ ਤਾ ਗੱਲਾਂ ਨੇ ਇੱਥੇ ਤਾਂ ਗੱਲ ਹੈ ਕੋਈ ਛੰਗਾ ਆਗਮੀ ਕੋਈ ਵੱਡਾ ਆਦਮੀ ਤੇਰਾ ਜਸ ਕਿਸੇ ਦਾ ਬੜਿਆ ਮਹੱਲਾ ਚੌਥਾ ਅੰਦੇ ਚਾਨਣ ਤਾਂ ਥੀਏ ਤਾਂ ਥੀਏ ਦੇਰੇ ਨੂੰ ਤਾਂ ਚਾਨਣ ਜਦੇ ਮਿਲੂਗਾ ਕਿ ਅੰਦਾ ਕੋਈ ਹੈ ਉਹਨੂੰ ਚਾਨਣ ਚਾਹੀਦਾ ਉਹ ਗਿਆਨ ਮਿਲਣਾ ਸਤਿਗੁਰ ਦੀ ਰਜ਼ਾ ਵਿੱਚ ਚੱਲੇ ਤੇ ਪਾਣ ਦੇ ਵਿੱਚ ਚੱਲੇ ਤੇ ਨਹੀਂ ਬਰਬਾਦੀ ਨੂੰ ਬੁਲਾਤੇ ਕੇ ਬੁੱਢੇ ਤੇ ਬਹਿਣਾ ਜਾਨ ਦੀ ਲੋੜ ਨਹੀਂ ਤਾਂ ਇਹ ਸਵੇਰ ਨਹੀਂ ਚੱਲਦੀ ਜਾਂਦੀ ਦੂਤੀ ਸੰਸਾਰ ਸਾਨੂੰ ਕਿਹਾ ਅੰਧੇ ਚਾਨਣ ਤਾਂ થી ਉਹ ਜੀਵਨ ਦਾ ਇਹ ਧੂਆਦਲਾ ਕੋਲ ਤੀਸਰੀ ਅੱਖ ਹੋ ਗਈ ਨਾ ਖਾਸ ਵੀ ਧੀਲੇਣ ਮਾਣ ਕੋਈ ਆ ਦੋਰੀਆਂ ਇਹ ਨਹੀਂ ਉਹਦਾ ਵਿਰੋਧਕ ਅੱਖ ਹੈ ਤੇ ਕੋਈ ਦੂਜੀ ਅੱਖ ਹਿੱਤਾਂ ਉਹ ਆਪ ਕੋ ਖੋਲਣ ਵਾਲਾ ਸੀ ਤਾਂ ਇਹ ਖੜ ਲੈ ਠੀਕ ਹੈ ਜੀ ਹੋ ਗਈ ਹੈ ਤੇ ਕੀ ਤੋਂ ਨਾਲ ਅਦਭੁਤ ਤੇ ਕਿਲਾ ਹਰਦਤ ਵੀ ਜੇ ਜੇ ਕਿਤੇ ਬਾਹਰ ਮਿਲ ਕੇ ਵੇ ਅਸਾਰਾ ਸਿਸਟਮ ਹੀ ਫੇਲ ਗਿਆ ਦੀ ਲੋੜੇ ਦੀ ਮਨ ਤੋਂ ਨਹੀਂ ਠੀਕ ਹੈ ਅੰਦੇ ਚਾਨਣ ਤਾਂ ਕੀਏ ਜੇ ਸਤਪੁਰ ਮਿਲਿਆ ਰਜ਼ਾ ਗਤਗੁੜੀ ਰਾਜਾ ਉਹਦੇ ਨਾਲ ਸਹਿਮਤ ਹੋ ਜਵੇ ਸੋਚੋ ਦੋ ਦੇਖੋ ਦੀ ਇੱਕ ਸੋਚ ਆ ਮਾਇਆ ਦੀ ਭੁੱਖ ਦੀ ਦਿਲ ਕਵਨ ਕਰਾਵੇ ਕਵਨ ਚ ਆਵੇ ਦੇ ਕਿ ਨਾ ਤਾਂ ਵੀ ਇਹ ਤਰਗਾ ਦਿੱਤੇ ਤੇ ਉਹਦੀ ਜਿਬ ਬਾਰੀ ਤੇਰੀ ਜਿਬ ਬਾਰੀ ਕੋਈ ਨਹੀਂ ਤੂੰ ਦੋ ਧਿਆਨ ਹਟਾ ਲੈ ਉਧਰੋਂ ਆਉਂਦਾ ਧਿਆਨ ਹਟਾ ਕੇ ਉਧਰ ਪੂਰੇ ਪਾਸੇ ਕਰ ਸੱਜੇਲੇ ਪਾਸੇ ਮਾਇਆ ਪਾਸੇ ਧਿਆਨ ਹਟਾਇਆ ਇੱਕ ਧਿਆਨ ਹੋ ਗਿਆ ਹੁਣ ਠੀਕ ਹੈ ਜੀ ਜਦ ਧਿਆਨ ਇੱਕੋਂ ਗਿਆ ਮਾਨੇ ਗਿਆ ਜਾਂ ਧਿਆਨ ਦੋ ਪਾਸੇ ਤਾਂ ਦੋ ਦੋ ਅਗਰ ਜੇ ਦੋ ਪਾਸੇ ਧਿਆਨ ਤੋਂ ਮਾਇਆ ਚ ਧਿਆਨ ਤੋੜ ਲਿਆ ਹੋਣਾ ਜੀ ਮਾਇਆ ਤੋਂ ਦੂਰ ਹੋਰਦਾ ਤੇਰ ਕੁੜੀ ਦਿਮਾਗ ਹੈ ਆਪਣਾ ਦਿਮਾਗ ਨਾਲ ਬਰੀ ਕਰਦਾ ਕੁਝ ਉਹ ਤੂੰ ਤੋਂ ਭਲੀ ਕਰ ਤੂੰ ਸਦਾ ਖਲਾਮਤ ਮੈਂ ਤੇਰੀ ਛੱਡਦੀ ਤੇਰ ਠੀਕ ਹੈ ਜੀ ਬੰਦਨ ਤੋੜ ਸਤਿ ਵਸੈ ਅਗਿਆਨ ਅੰਧੇਰਾ ਜਾਏ ਇੱਥੇ ਆ ਕੇ ਬੰਦਨ ਤੋੜਦੇ ਮਾਇਆ ਚੜ੍ਹਦੀ ਆਪਣੇ ਬੰਦਨ ਟੁੱਟਦੇ ਮਾਇਆ ਨਾ ਰਸਾਈ ਤੋੜ ਲਿਆ ਉਹਦੇ ਟੁੱਟਦੇ ਤੋਂ ਬਾਅਦਾਂ ਜੋੜ ਅਵਲਸ ਨੂੰ ਤੋੜੀ ਪੁੱਤਰ ਖਲਕਾ ਕਰਕੇ ਕਰਦਾ ਸੀ ਪੁੱਤਰ ਖਲਕਾ ਨਾ ਵੀ ਤੋੜਨੀ ਪੈਗੀ ਮਾਇਆ ਲੇ ਕੇ ਤੋੜਨੀ ਟੋੜੀ ਐ ਅੰਦਰੋਂ ਅੰਦਰੋਂ ਘਰ ਦੇ ਉੱਤੇ ਉੱਤੇ ਵੀ ਟੋੜੀ ਐ ਉਹਦੇ ਵਿੱਚ ਕੀ ਕਾਇਨਾਤ ਟੋੜੀ ਠੀਕ ਹੈ ਮੈਂ ਟੋੜਨੀ ਮੇਰੇ ਔਲਾਦ ਮੈਂ ਔਲੇ ਖਾਤਰ ਕੁਝ ਕਰਨਾ ਇਹ ਧਰਮ ਦੀ ਠੀਕ ਹੈ ਜੀ ਚਲੋ ਦੁਨੀਆ ਸਾਰਾ ਮੇਰਾ ਠਾਖਾ ਬਾਬਾ ਠਾਖਾ ਬਾਬਾ ਰੂਗਾ ਦੁਦਿਓ ਲੇਵਾ ਦੇਵੀ ਤੁਸਤਨ ਸੋ ਵਿਹਾਰ ਆ ਮੇਵਾ ਦੇਵੀ ਆ ਵਿਹਾਰ ਅਸਲੀ ਜਿਹੜਾ ਅੱਗੇ ਵਾਲਾ ਦਰਗਾਹ ਵਾਲਾ ਸੁਣਤਾ ਨਾਲ ਸਾਰੇ ਢਾਠਾ-ਬਾਗਾ ਘਰ ਦੇ ਨਾਲ ਸਾਰੇ ਨਾਲ ਮਿੱਤਰਾਂ ਗਿਆਨੀ ਕੀ ਗਾ ਤਾਂ ਗਿਆਨੀ ਜਾਣ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਢਾਠਾ-ਬਾਗਾ ਵੀ ਉਹ ਜਾਂਦਾ ਹਾਂਜੀ ਬੰਦਨ ਤੋੜੇ ਸੱਚ ਵਸੇ ਅ ਗਿਆਨੰ ਕੰਨਾਂ ਤੋਂੜੇ ਫਤਿਹ ਵਾ ਸੱਜਾ ਬੰਦ ਮਾਇਆ ਲੈ ਤੈਨੂੰ ਕੁੱਲੀ ਛੱਡਦੀ ਫੇਰ ਅੱਗੇ ਸੱਚ ਦੀ ਬਸੇ ਮਾਇਆ ਹੀ ਜਾਂਦੀ ਜਾ ਲ ਮਾਇਆ ਝੂਠੀ ਛੱਡਦੀ ਗਿਆ ਤੇ ਚਲੇ ਹੀ ਜਾਣੀ ਤੇਰਾ ਹੁੰਦਾ ਹੀ ਠੀਕ ਹੈ ਜੀ ਸਭ ਦੇਖਿਆ ਕਾ ਜਿਨ ਕੀ ਆ ਤਨ ਸਾਜ ਨਾਨਕ ਸ਼ਰਨ ਕਰਤਾਰ ਕੀ ਕਰਤਾ ਰਖੇ ਲਾਜ ਜੇ ਕੋਈ ਦੀਦਾ ਸਾਰਾ ਕੁਝ ਮੁਕਰਤੇ ਬੁਰਖ ਦਾ ਬੁਲਦਾ ਆਪਣਾ ਨਹੀਂ ਬੁਲਦਾ ਕਿ ਆਪਣਾ ਨਹੀਂ ਤਾਂ ਅਨੁਨੀ ਕਰ ਸਕਦਾ ਜਿਨ ਕੀਆ ਤਨ ਸਾਜ ਜਿਹਦੇ ਤਨ ਸਾਜ ਹੈ ਠੀਕ ਹੈ ਸਰੀਰ ਸਾਜ ਹੈ ਤਨ ਪਹਿਲਾਂ ਤੇਰਾ ਅੱਲਾ ਸਰੀਰ ਸਾਜ ਹੈ ਫਿਰ ਹੁਕਮ ਦੇ ਉਹ ਹੁਕਮ ਦਾ ਸਭ ਕੁਝ ਸਾਜ ਬੋਲਦਾ ਇਹ ਅੰਦਰਲਾ ਬੋਲਿਆ ਹੁਣ ਗੁਰਬਾਣੀ ਅੰਦਰਲੀ ਵੀ ਹੈ ਗੁਰਬਾਣੀ ਹੈ ਉਹਦੀ ਬੋਲ ਰਿਹਾ ਤੇ ਸਾਰਾ ਮਨ ਫਿਰ ਦੇਖਾ ਕੀ ਪਹਿਜੰਦਾ ਹੈ ਕਿਹਾ ਤਾਂ ਸੀ ਗੁਰਬਾਣੀ ਦੀ ਭक्ति ਫੜਦੇ ਹਾਂ ਸਰਮਾ ਉਹ ਵੀ ਬਰਬੂੰਦਾ ਬੰਦਾ ਇਹ ਤੋਂ ਬੋਲ ਨਹੀਂ ਸਕਦਾ ਠੀਕ ਹੈ ਜੇ ਅੰਤਰਾ ਹੈ ਹੁਣ ਇੱਕ ਹੋਇਆ ਹੋਇਆ ਬੋਲਦਾ ਇੱਕ ਹੋਇਆ ਹੋਇਆ ਕਿ ਇੱਕ ਹੈ ਉਹ ਬੋਲ ਰਿਹਾ ਇਹਦੇ ਇੱਕ ਦੇ ਉੱਤੇ ਜੀ ਹੈ ਜਿੱਦੇ ਉਸ ਇੱਕ ਦੇ ਉੱਤੇ ਹੁਕਮ। ਤਾਂ ਤਾਂ ਵੀ ਸਾਜਿਆ ਇਹਨੂੰ ਸ਼ਰੀਰ ਦਿੱਤਾ ਨਹੀਂ ਇਹਨੇ ਸ਼ਰੀਰ ਭਗਿਆ ਨਹੀਂ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇ ਹੀ ਭਾਈ ਇਸੇ ਨਾਲ ਪਾਈ ਹੈ। ਗੁਰਸੇਵਾ ਭਗਤ ਕਮਾਈ ਇਸੇ ਨਾਲ ਕੀਤੀ ਸੀ ਪਿਛਲੇ ਪਿੱਛੇ। ਐ ਸਾਨੂੰ ਪਰੇਖਾ ਪੁੱਛਦਾ ਅਸੇ ਗੁਰਬਾਣੀ ਜਦ ਜਿਹੜੇ ਗੁਰਬਾਣੀ ਦੇ ਉਪਦੇਸ਼ ਆ ਉਹਨੂੰ ਬੁੱਧੀ ਆਵਾਜ਼ ਬੁੱਧੀ ਆਵਾਜ਼ ਨਹੀਂ ਹੁੰਦੀ ਉਹ ਹੈ ਉਦੀ ਆਵਾਜ਼ ਨਹੀਂ ਧੱਕੇ ਹੁੰਦੀ ਹੈ ਕਰਮ ਧਰਮ ਕਰਕੇ ਹੁੰਦੀ ਆ ਦੀ ਆਵਾਜ਼ ਬਾਹਰੀ ਆਵਾਜ਼ ਇਸਰਾਫ ਹੋ ਜਾਂਦੀ ਉਹ ਆਪੇ ਮਰ ਜਾਂਦਾ ਖਤਮ ਹੋ ਜਾਂਦਾ ਆਪੇ ਜੋਤੀ ਜੋ ਸਮਾ ਜਾਂਦਾ ਠੋੜੀ ਨਾਨਕ ਸ਼ਰਨ ਕਰਤਾਰ ਕੀ ਕਰਤਾ ਰਖੇ ਕਹਿੰਦਾ ਦੋ ਨੇ ਇੱਕ ਪ੍ਰਗਟ ਕਰਤਾ ਤੇ ਗੁਪਤ ਕਰਤਾ ਕਰਤਾ ਕਰਤਾ ਨੂੰ ਹੀ ਹੈ ਜੀ ਪਰਵਰਤ ਕਰਤਾ ਦਾ ਹੈਗਾ ਚਿੱਤ ਪਰ ਜਿੱਦਾਂ ਬੋਲ ਰਿਹਾ ਕਰਤਾਰ ਕਹਿ ਰਿਹਾ ਕਿਸ ਨੂੰ ਹੋਰ ਜਿੱਦਾਂ ਕਰਤਾਰ ਹੁਕਮ ਉਹ ਤੂੰ ਆ ਤੇ ਲਾਗੂ ਆ ਬ੍ਰਹਮ ਤੇ ਵੀ ਲਾਗੂ ਹੈ ਯਾ ਸੱਚ ਹੋ ਨਰ ਗਦਾਸ ਮੁਖਤੇ ਜੋ ਬੋਲਦਾ ਆ ਯਾ ਵਾਹ ਸਾਚੋ ਵਾਹ ਕਹਣਾ ਜੇ ਮਨ ਆਪਣੇ ਕਰਤਾ ਦੀ ਛਣ ਰਹਿ ਮੈਂ ਆਪਣੇ ਕਰਤਾ ਦੀ ਛਣ ਰਹਿਣਾ ਫਿਰ ਨੇ ਚਿਤਰੀ ਛਣ ਰਹਿਣਾ ਚ ਹੈ ਹੀ ਤਾਂ ਹੈਗਾ ਹੀ ਆ ਛਣ ਦਾ ਪਹਿਲੇ ਪਰ ਕਿਤੇ ਨਿਲੋ ਜਾਵੇ ਜਦੋਂ ਤਾਂ ਪਹਿਲੇ ਸ਼ੰਕਾ ਦੀ ਫਟ ਰਹੇ ਦੋਲਣਾ ਤੇਰਾ ਕੋਪਰੂ ਦੋਲਣਾ ਾਬੇ ਹੋ ਜੀਔੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦੋਂ ਪੁੱਛਣਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਆ ਕਰਤੇ ਪੁਰਖ ਨੇ ਹਮੇਸ਼ਰ ਕਿਸੇ ਨੇ ਸਵਾਲ ਨਹੀਂ ਲਈ ਥਾਟ ਕੀਆ ਸ੍ਰਿਸ਼ਟੀ ਦਾ ਜੀ ਠੀਕ ਹੈ ਬੀਆ ਬੀਆ ਦੂਸਰਾ ਕੋਈ ਖੱਤੇ ਤਾਦੂਆਂ ਪੁੱਛਣਾ ਸੇਵਕ ਬੀਆ ਆ ਜਿਹੜੇ ਦੂਸਰੇ ਸੇਵਕ ਉਸਾਰੀ ਲੋਕ ਨੇ ਇਹਨਾਂ ਦੀ ਕਿਸੇ ਦੀ ਸਲਾਹ ਨਹੀਂ ਲਈ ਸੱਚਖੰਡ ਵਾਲਿਆਂ ਦੀ ਸਾਰਿਆਂ ਦੀ ਸਲਾਹ ਇੱਥੇ ਸੇਵਕ ਦੀ ਗੱਲ ਹੈ ਇੱਥੇ ਸੱਚਖੰਡ ਦਾ ਤਾਂ ਕੋਈ ਗੱਲ ਸੱਚਖੰਡ ਵਾਲਿਆਂ ਦੀ ਤਾਂ ਸਲਾਹ ਉਹਦਾ ਹੁਕਮ ਉਹਨਾਂ ਦੀ ਸਾਰਿਆਂ ਦੀ ਸਲਾਹ ਸਾਰਿਆਂ ਦੀ ਇੱਕ ਹੈ ਉਹਨਾਂ ਨੂੰ ਕੋਈ ਰੌਲਾ ਨਹੀਂ ਵਾਹ ਹਾਣੇ ਦਾ ਜਾਰੀ ਬੰਦੇ ਨੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਜੇ ਕੋਈ ਕਹਿੰਦਾ ਕਿਸੇ ਗ੍ਰੰਥ ਚ ਬਿਸ਼ੂਤੀ ਸਾਤ ਦਿਨਾਂ ਲਿਖੇ ਬਿਚ ਬੜਾਏ 6 ਦਿਨ ਬੜਾਏ 1 ਦਿਨ ਰਸਤ ਗੱਲ ਝੂਠ ਹੈ ਨੇ ਕਹੀ ਉਹ ਯੁੱਧ ਦੇ ਵਿੱਚ ਉਹ ਕੱਲੇ ਕੱਲੇ ਗੱਲ ਨੂੰ ਕਟਿਆ ਹੋਇਆ ਗੁਰਬਾਣੀ ਦੇ ਸਾਨੂੰ ਧਿਆਨ ਹੈ ਵੀ ਇਹ ਗੱਲ ਲਿਖੀ ਕਿਉਂ ਫਰਕ ਗੱਲ ਦੀ ਕੋਈ ਬੈਕਗ੍ਰਾਉਂਡ ਹੈ ਹਰ ਕੰਪਨੀ ਦੇ ਪਿੱਛੇ ਕੋਈ ਬੈਕਗ੍ਰਾਉਂਡ ਹੈ ਜੋ ਬੈਕਗ੍ਰਾਉਂਡ ਦਾ ਧਿਆਨ ਨਹੀਂ ਕਾਫੀ ਤੁਹਾਡੇ ਕੋਲ ਅੱਖਰੇ ਰਹਿ ਗਏ ਤੇ ਤੱਖਰੇ ਨੇ ਜੋ ਮੰਗਦੀ ਅਰਜ਼ ਕਰੇ ਜੋ ਮਰ ਜੀਨੇ ਅਰਜ਼ ਕਰ ਸਕਦੇ ਪਿੱਛੇ ਕੋਈ ਧਰਮਾਂ ਦੇ ਵਿੱਚ ਕੁਝ ਕਿਹਾ ਹੋਇਆ ਲੋਕਾਂ ਨੂੰ ਸੁਭਿਆ ਹੈ ਨੂੰ ਉਹ ਧਰਮਾਂ ਦੇ ਖਰਾਬ ਅਵਰਚਨ ਸੱਚ ਖੁੱਲਦਾ ਹੈ ਜਦੋਂ ਪਰਪੇਰ ਖਰਨੇ 88 ਦੇ ਚਾਇਆ ਥਾ ਸਾਰਾ ਸੰਸਾਰ ਪਰ ਆ ਗਿਆ ਸੀ ਤਾ ਉਹਨੂੰ ਕਿਸੇ ਸੇਵਕ ਬਣਾਉਣੀ ਪਈ। ਜਦੋਂ ਉਹ ਸੇਵਕ ਵਰਤੇ ਸੇਵਕ ਜਿਹਨਾਂ ਨੇ ਜਨਮ ਲੈ ਸ੍ਰਿਸ਼ਟੀ ਚ ਆ ਕੇ ਉਹ ਸਾਰੇ ਸੇਵਕ ਚਾਰੇ ਲੱਖ ਵੀ ਸੀ। ਠੀਕ ਹੈ ਜੀ। ਗੁਰੂ ਜੀ ਉਹ ਵੀ ਸੇਵਕ ਹੈ। ਜੀਨਾ ਨੇ ਸ੍ਰੀਰਤਾ ਹੜ ਕੀਤਾ ਚਾਹੇ ਉਹ ਕੋਈ ਵੀ ਸੀ ਵੱਡੇ ਤੋਂ ਵੱਡੇ। ਕਿ ਉਹ ਵੱਡੇ ਨਹੀਂ ਤਾਂ ਵੱਡਿਆਂ ਘਰ ਦੇ ਲੋਕ ਉਹਨਾਂ ਨੂੰ ਬੁਰਜੇ ਵੀ ਦੇ। ਉਹਿਆ ਹੀ ਆਪਣੀ ਜਗ੍ਹਾ ਪਰਮਿਸ਼ਨ ਦੀ ਬਰਾਬਰੀ ਆਪਣੀ ਜਗ੍ਹਾ। ਸਾਡੇ ਨਾਲ ਹੋਣ ਸੀ। ਸਿਸਟੀ ਨਾਲ ਬੋਲਦੇ ਹਾਂਜੀ ਤਦੋਂ ਕਿਆ ਕੋ ਲੈਵੇ ਕਿਆ ਕੋ ਦੇਵੇ ਜਾਂ ਅਵਰਨ ਦੂਜਾ ਕੀ ਆ। ਉਹਨਾਂ ਕੀ ਕੋਈ ਲੈਂਦਾ ਕੀ ਕੋਈ ਦੁੱਦਾ। ਤਾਂ ਕਿਸੇ ਆਪ ਉਹ ਦੱਟਾ ਨਾ ਕਿਸੇ ਕੋਈ। ਜੇ ਦੂਜਾ ਕੋਈ ਥਾਈ ਨਹੀਂ ਕੋਈ ਸੀ ਕਰੋ ਨਿਹਰਾਸ ਕਰਮਾਂ ਦੀ ਥੈਲੀ ਕਹਿੰਦੇ ਨੇ ਦਿੱਤੀ ਉਹ ਨੂੰ ਕੋਈ ਕੁਛ ਕਰਦਾ ਜਿੱਦ ਤੱਕ ਕੋਈ ਕੁਛ ਕਰਦਾ ਦਿੱਤਾ ਜੇ ਦੂਆ ਥਾਈ ਕੋਈ ਉੱਥੇ ਕਿਨਾ ਬੇਰਹਾਤੀ ਕੀ ਲੈਣ ਉਹ ਜਿਹੜਾ ਕਰਮ ਭਰੋਸਤੀ ਹੈ ਕਰਮ ਭਰੋਸਤੀ ਕਰਮ ਤੋਂ ਜਾਲੂਬਿਲ ਉਹ ਕਿੱਥੇ ਆਵੇ ਉਹ ਰਵਦਾਤ ਕਹਿੰਦੇ ਕੋਈ ਦਾ ਜੇ ਕੋਈ ਥਾਈ ਨਹੀਂ ਕਲਮ ਕਲ ਤੇ ਆਇਆ ਕਲਮ ਵੱਧ ਤੂੰ ਜੀ ਕਹਤੋ ਕਲਮ ਕਹੋ ਜੀ ਦੀਦ ਦੇ ਤੁਸੀਂ ਦੱਸੋ ਕਰਮਬੱਧ ਜੀ ਰੂਹ ਕਹਦੇ ਹੋ ਇਹ ਜੀ ਨੂੰ ਜੀ ਆਪ भक्ति ਉਸ ਭक्ति ਨੂੰ سپورਟ ਕਰ ਰਹੀ ਹੈ ਹਰ ਭਗਤੀ ਕਿਸੇ ਨਾ ਕਿਸੇ ਭਗਤੀ ਦੀ سپورਟ ਕਰ ਰਹੀ ਹੈ ਕਿ ਆ ਕਿਸੇ ਗਲਤ ਭਗਤੀ ਨੂੰ ਘਟ ਰਹੀ ਕੋਲ ਫਿਰ ਆਪੇ ਜਗਤ ਪਾਇਆ ਕਰਤਾ ਦਾਨ ਕੋ ਫਰ ਆਪੇ ਚਰਤੋ ਪਾਇਆ ਕਰਤੇ ਕਰਤੇ ਦੇ ਆਪੇ ਜੈਸ ਕਰ ਲਿਆ ਜਾਣ ਸਮੇ ਕੋ ਦਿਆ ਦਿੱਤਾ ਹੀ ਦਿੱਤਾ ਸਾਰੇ ਲੋਕੋ ਚ ਇਹ ਤਾਂ ਕੋਈ ਲੈਣਾ ਉੱਤ ਕੀ ਸੀ ਇਹਨਾਂ ਨੇ ਤਾਂ ਆਪਣਾ ਦੁਆ ਲਿਆਤਾ ਜੂਏ ਕਿ ਹਾਲ ਲਿਆਤਾ ਜਿਵੇਂ ਤੁਹਾਡੀ ਹਾਰ ਜਾਂਦਾ ਜੇਦਾ ਵਰ ਮਾਗਦਾ ਨੇ ਹਰੇ ਹੋਏ ਨੂੰ ਫੇਰ ਬਰਮਾ ਸਦੀ ਪਿਆ ਹੋਜੀ ਆਪੇ ਸੇਵ ਬਣਾਈਆਂ ਗੁਰਮੁਖ ਆਪੇ ਅੰਮ੍ਰਿਤ ਪੀਆ ਆਪੇ ਦੇ ਬਣਾਈਆਂ ਗੁਰਮਖਾ ਗਏ ਆਪਣੀ ਸਭ ਕੁਝ ਕੀਤਾ ਸੇਵਾ ਵੀ ਆਪੇ ਬਣਾਈ ਹੈ ਸੇਵਾ ਵੀ ਆਪੇ ਕੀਤੀ ਹੈ ਅੰਮ੍ਰਿਤ ਵੀ ਆਪੇ ਪੀਤਾ ਖਾਂ ਕੁਛ ਗੁਪਤ ਵਾਰ ਨੂੰ ਰੂਦੀ ਰਹੀ ਬਿਨਾ ਗਲਾ ਦੇ ਸੋਲ ਵਾਲੀ ਆਵਾਜ਼ ਕੋਲ ਨੂੰ ਸਾਾਨੂੰ ਉਹੀ ਰਹਦੀ ਹੈ ਸਭ ਸਾਰੀ ਗਿਆਨ ਵੀ ਇਹ ਕਰਕੇ ਵਧਰੇ ਹੈ ਇਹ ਸਭ ਸਾਰੀ ਗਿਆਨ ਕੀ ਬੱਜਦਾ ਇਹ ਕਿਥੋਂ ਹੁੰਦਾ ਜੇ ਦਾ ਰਾਜ ਹੋਇਆ ਤਾਂ ਜਾਂ ਸਭ ਸਾਰੀ ਹੈ ਚਾਹੇ ਹੈ ਸਭ ਗਿਆਨ ਵਧਰੇ ਵੀ ਅੰਦਰ ਗਿਆਨ ਦੀ ਵੀ ਸੋਚੀ ਅੰਦਰੋਂ ਹੁੰਦੀ ਹੈ ਸਵਾਲ ਤਾਂ ਹੈ ਤਾਂ ਜਿਹੜਾ ਪ੍ਰਾਪਤ ਕਰਨ ਵਾਲਾ ਚੁੱਕਾ ਜੇ ਅੰਦਰ ਸੋਚੀ ਦੀ ਭੁੱਖ ਉਹਦੀ ਭੁੱਖ ਦਾਇਆ ਦੇ ਗੱਲ ਦੀ ਹੈ ਜਾਂ ਆਤਮ ਜਲਦੀ ਉਹਦੀ ਤੁਖ ਕੀ ਹੈ ਜੋ ਬਗ ਘਾਗੁਰ ਆਪਣੇ ਤੇ ਸੋਈ ਸੋਈ ਦੇਵੈ ਜਾਨਕ ਦਾਸ ਮੁਖ ਤੇ ਜੋ ਬੋਲੇ ਸਿਆ ਹੋ ਸੱਚ ਗੱਲ ਭਾਈ ਸੱਚੀ ਹੈ ਜੋ ਬੁੱਧਰਾ ਆਦਮੀ ਸ਼ਦਾਈ ਹੋ ਕੇ ਖੁਦੀ ਸ਼ਦਾਈ ਹੁੰਦੈ ਜੋ ਮੰਨਦਾ ਨਮਦਾ ਸ਼ਰਾਈ ਹੋ ਜਾਣਾ ਦੁਨੀਆਂ ਨੂੰ ਕਹਿੰਦਾ ਫਿਰ ਉਹ ਤੇ ਤੇ ਰੋਗੀ। ਇਤਰੀਆਂ ਤੋਂ ਆਪੇ ਸੇ ਬਣਾਇਆ ਸੁਰਮਖ ਆਪੇ ਅੰਮ੍ਰਿਤ ਨਿਰੰਕਾਰ ਆਕਾਰ ਹੈ। ਆਪੇ ਆਪ ਕਰੈ ਸੋਥੀਆ। ਸੇਵਾ ਜਿਹੜੀ ਕੀਤੀ ਨੇ ਆਪ ਕੀਤੀ ਹੈ ਕਾਲ ਕਬੋਈ ਆਪ ਹੀ ਹਾਂ। ਪਰ ਆਨਵਾਸ ਤੇ ਪ੍ਰੇਰਿਆ ਸਵਾਲ ਵਾਸਤੇ ਕਿਹ ਹੈ ਨੂੰ ਵੀ ਐ ਕਰ ਲੈ ਤੂੰ ਭਾਈ ਗੁਰਬਾਣੀ ਹੁਣ ਸਾਨੂੰ ਕਰਨ ਵਾਸਤੇ ਖੈਦੀ ਹੈ ਇਹ ਕਰ ਲੋ ਕੱਲਾਂ ਤਾਂ ਸੀ ਆਪੇ ਅਮਰ ਹਾਂਜੀ ਆਪ ਨਿਰੰਕਾਰ ਆਕਾਰ ਹੈ ਸਮਝਾਓ ਇਹਦਾ ਕੀ ਭਾਵ ਸੱਚ ਛੱਡ ਬਸੇ ਦੁਨਤਾ ਜਦੋਂ ਤਿਰਕੁੱਡੀ ਛੱਡ ਦਿੰਦਾ ਉਦੋਂ ਜਿਹੜਾ ਅਕਾਰ ਹੈ ਜਿਹੜਾ ਆਕਾਰ ਪੂਰਾ ਅੱਖਾਂ ਕੰਨ ਤੱਕ ਸਾਰਾ ਸਰੀਰ ਹੈ ਉਹਨੂੰ ਲੇਕ ਅਹੇਜਾ ਆਕਾਰ ਨਹੀਂ ਹੈ ਜਿਹੜਾ ਅੱਖਾਂ ਨੂੰ ਦਿੱਤੇ ਸੰਸਾਰ ਉਦੋਂ ਇੱਕੋ ਆਕਾਰ ਹੈ ਸਾਰਿਆਂ ਦਾ ਜੋਤ ਉਹ ਆਕਾਰ ਦੱਸਿਆ ਨਹੀਂ ਜਾ ਸਕਦਾ ਇਹ ਉਹਦੇ ਪਰਿਥਾਈ ਕਿ ਹੈ ਵੀ ਹੈ ਤਾਂ ਅਸਲ ਵਿੱਚ ਆਕਾਰ ਪਰ ਸਾਡੀਆਂ ਅੱਖਾਂ ਵਾਸਤੇ ਨਿਰੰਕਾਰ ਹੈ ਜੀ ਨਾਰਾਨ ਜੀ ਵਾਸਤੇ ਜਦ ਇੱਕ ਹੋ ਜਾਂਦਾ ਹੈ ਜਦ ਨਿਰੰਕਾਰ ਦਾ ਕੋਈ ਆਕਾਰ ਹੈਗਾ ਠੀਕ ਹੈ ਪਰ ਆ ਜਿਹੜਾ ਅੱਗੇ ਨਿਰੰਕਾਰ ਨਿਰੰਕਾਰ ਵਾਸਤੇ ਲਿਖਿਆ ਉਹ ਆਕਾਰ ਲਿਖਿਆ ਨਾ ਰੰਕਾਰ ਆਕਾਰ ਆ ਨਾਕਾਰ ਅੱਖਾਂ ਨੂੰ ਦਿਖਣ ਵਾਲਾ ਸਾਡੇ ਕੋਲ ਆਕਾਰ ਜਿਹਨੂੰ ਸਤਿ ਸਾਰੀ ਬੋਲੀ ਚ ਬੋਲਦੇ ਆ ਉਹ ਅੱਖਾਂ ਨੂੰ ਦਿਖਣ ਨੇ ਸਾਰੇ ਆਕਾਰ ਠੀਕ ਹੈ ਉਹ ਕਹਨੇ ਹੈ ਜਾਦਾ ਦੀ ਹੈਗਾ ਸੰਸਾਰ ਚ ਰੰਗ ਹੈ ਉਹਦਾ ਪਰ ਇਹ ਜਾ ਰੱਖ ਨਹੀਂ ਜਿਹੜਾ ਖੁਦ ਦਿਖੇ ਸੰਸਾਰੀ ਰੂਪ ਦੇ ਰੂਪ ਹੈ ਉਹਦਾ ਪਰ ਇਹਦਾ ਰੂਪ ਨਹੀਂ ਹੈ ਫੇਕਾ ਕੋਈ ਚੀਜ਼ੇ ਦੀ ਹੋ ਫੇਕਾ ਉਹ ਵਜੂਦ ਹੈ ਜੇ ਰੱਬ ਦੀ ਰੂਪ ਨਹੀਂ ਦੇਖਣੀ ਦੇਖਣੀ ਹੈ ਉਹਦਾ ਕੀ ਰਾਮ ਦਾ ਰੂਪ ਹੈ ਨਹੀਂ ਜਿਹਦੇ ਅੱਖ ਹੈ ਨਹੀਂ ਕੰਨ ਹੈ ਨਹੀਂ ਫਿਰ ਦੇਖਦਾ ਤਾਂ ਸਾਡੀ ਫਰਿਆ ਸੁਪਦਾ ਕਿਉਂ ਹੈ ਜਿਹਦਾ ਕੋਈ ਵजूद ਹੀ ਨਹੀਂ ਸਕਦੇ ਕਾਲ ਮੂਰਤ ਹੈ ਫਿਰ ਰੇਖ ਨਹੀਂ ਹੈ ਉਹਦੀ ਕੋਈ ਬਿਲਕੁਲ ਰੇਖਾ ਨੂੰ ਤਾਂ ਨਹੀਂ ਕੀਤਾ ਜਾ ਸਕਦਾ ਆਕਾਸ਼ ਨੂੰ ਰੇਖਾ ਤਲੀ ਹਵਾ ਨੂੰ ਵੀ ਤੁਸੀਂ ਰੇਖਾ ਤਲੀ ਕਰ ਸਕਦੇ ਹਵਾ ਦੀ ਤਸਵੀਰ ਨਹੀਂ ਬਣਾ ਸਕਦੇ ਆਕਾਸ਼ ਦੀ ਤਸਵੀਰ ਨਹੀਂ ਬਣਾ ਸਕਦੇ ਬਣਾ ਕੇ ਦਿਖਾਓ ਉਹ ਤੁਸੀਂ ਅਵੇਜਨ ਕੀਤੇ ਹੋਏ ਰਹੇ ਵੀ ਐ ਕਰਦੀ ਇਹ ਕਹਾਵਾ ਸਾਡੇ ਮੰਨੇ ਨੇ ਸੰਸਾਰੀ ਲੋਕਾਂ ਨੂੰ ਕੀ ਆਖਾਰ ਹੈ ਹਵਾਲਾ ਆਪੇ ਆਪ ਕਰੈ ਸੋ ਥੀਆ ਆਪੇ ਆਪ ਕਰੈ ਸੋ ਥੀਆ ਹੁੱਦਾ ਹੋਆ ਜਿਹੜਾ ਉਹ ਆਪ ਕਰਦਾ ਕਬੀਰ ਕਹਿੰਦਾ ਤੁਹਾਡੀ ਗੱਲ ਦਾ ਮੈਂ ਜਵਾਬ ਦੇਣਾ ਹੁਣ ਹੈ ਤੇ ਨਹੀਂ ਹੈ ਉਹਦਾ ਸਰੂਪ ਹੈ ਤਾਂ ਸਹੀ ਲਖੇ ਜੇ ਕੋਈ ਇਹਦਾ ਦੇਖ ਲਿਆ ਇਹ ਦੇਖ ਲੇ ਆ ਆਤਮਿਕ ਸਭ ਕੁਛ ਜਿਹਨੇ ਆਤਮ ਦੇਖ ਲਿਆ ਆਤਮਤਾ ਹੈ ਨਾ ਕੁਛ ਕਾਤਮ ਨਹੀਂ ਕੁਛ ਕਿ ਭੂਗੋ ਦਾ ਸਾਦਰ ਵੀ ਬੂਗ ਦਾ ਬਣਿਆ ਹੈ ਸਾਦਰ ਦੀ ਗੱਲ ਛੱਡੋ ਤੁਸੀਂ ਬੂਗ ਦੀ ਗੱਲ ਕਰ ਲਓ ਇੰਨਾ ਬੜਾ 2 2 2.5 ਕਿਲੋ ਦਾ ਫੇਰੀ ਚੱਕੀ ਘੁਰਦਾ ਪਹਿਲਾਂ ਕੀ ਹੈ ਵਿੱਚ ਅੱਜ ਲੱਗੜ ਜਾਂਦੀ ਹੈ 6 ਆਦੂ ਹੀ ਜਗਦੇ ਨੇ ਫਿਰ ਉਹ ਕੁਛ ਕੋਈ ਨਹੀਂ ਦੀ ਬੁਝਾਈ ਨਹੀਂ ਸੀ ਉਹ ਬੁਝਾਣਾ ਨਹੀਂ ਸੀ ਸ਼ਕਤੀ ਹੈ ਉਹ ਸ਼ਕਤੀ ਵੀ ਹੈ ਪਰ ਸ਼ਕਤੀ ਹੈ ਮਾਇਆ ਦੀ ਸ਼ਕਤੀ ਅਗਰ ਸ਼ਕਤੀ ਹੈ ਠੀਕ ਹੈ ਜੀ ਇੱਥੇ ਸਤਵੇਂ ਪੌੜੀ ਸਮਾਪਤੀ ਹੈ ਜੀ